ਚਲੋਕ ਮਹੱਲਾ ਪਹਿਲਾ ਭੁੱਲੀ ਭੁੱਲੀ ਮੈਂ ਫਿਰੀ ਫਾਦਰ ਕਹੇ ਨਾ ਕੋਈ ਪੁੱਛੋ ਜਾਏ ਸਿਆਣੀਆਂ ਦੁੱਖ ਕਾਟੇ ਮੇਰਾ ਕੋਈ ਭੁੱਲੀ ਭੁੱਲੀ ਮੈਂ ਫਿਰੀ ਫਾਦਰ ਕਹੇ ਨਾ ਕੋਈ ਕਿਸੇ ਬੰਦੇ ਨੇ ਪਰਮ ਗਿਆਨੀ ਨੇ ਪ੍ਰਚਾਰ ਕਰੇ ਆ ਜਿਹੜੇ ਸੰਤ ਤੇ ਮੈਨੂੰ ਨਹੀਂ ਕਿਹਾ ਵੀ ਤੂੰ ਭੁੱਲੀ ਹੋਈ ਫਿਰਦੀ ਐ ਮੈਂ ਤਾਂ ਭੁੱਲੀ ਫਿਰਦੀ ਸੀ ਰਾਸਤੇ ਦਾ ਨਹੀਂ ਸੀ ਪਤਾ ਔਰ ਕਿਸੇ ਨੇ ਨਹੀਂ ਕਿਹਾ ਸਮਝਾਇਆ ਵੀ ਕੁੱਲੀ ਹੋਈ ਏ ਤੂੰ ਕੁੱਲੀ-ਕੁੱਲੀ ਹੋ ਫਰੀ ਫਰੀ ਪਾਦਰ ਕਹਿਣਾ ਕੋਈ ਕਿਸੇ ਪਦਰ ਦੱਸਣ ਵਾਲੇ ਨੇ ਕਿਸੇ ਨੇ ਰਾਹ ਦੱਸਣ ਮੈਨੂੰ ਵੀ ਕਿਹਾ ਵੀ ਤੂੰ ਰਾਹ ਭੁੱਲੀ ਹੋਈ ਏ ਪੁੱਛੋ ਜਾ ਸਿਆਣਿਆਂ ਹੁਣ ਸਿਆਣਿਆਂ ਨੂੰ ਜਾ ਕੇ ਪੁੱਛੋ ਦੁੱਖ ਕੱਟੇ ਮੇਰਾ ਕੋਈ ਕੋਈ ਮੇਰਾ ਦੁੱਖ ਕੱਟੇ ਸਿੱਧੇ ਰਸਤੇ ਪਾਵੇ ਕੋਈ ਸਿਆਣਿਆਂ ਨੂੰ ਪੁੱਛੋ ਜਾ ਕੇ ਮੈਨੂੰ ਦੱਸੋ ਫੇਰ ਆ ਕੇ मेरा असली, केड़ है। असली केड़ा है असली भारत केड़ा है बाकी दा वो तो वो तो कहंदे नहीं बुली मेनू पता है मेनू मां ठीक रादी यार ही बुली हो गया पर तूए कहंदे नहीं बुली हो जी दसे कौन कोई मैनु दसए जेड़ा मिलू का है वे तू आर आर ठीकरी है और तो सयाणियां नु जाके पूछो मेरा तो कौन कटे मेनू मैं तो देख लिया सारे फिर तुज ਤੇ ਮਾ ਦਾ ਧੋਖਾ ਹੈ ਜਿਹੜਾ ਭੁੱਲੀ ਭੁੱਲੀ ਫਿਰਦਾ ਭੁੱਲੇ ਰਾ ਭੁੱਲਣ ਦਾ ਮੈਨੂੰ ਦੱਸੇ ਤੋਂ ਕੱਟੇ ਸਿੱਧਾ ਰਾ ਸਿੱਧੇ ਮਾਰਗ ਪਾਵੇ ਹੁਜੀ ਸਤਗੁਰ ਸੱਚਾ ਮਨ ਵਸੈ ਸਾਜਣ ਉੱਤ ਸੱਚੇ ਨਾਹੀਂ ਜਾ ਕੇ ਸਤਗੁਰ ਸੱਚਾ ਮਨ ਚ ਵਸ ਜਾਣਾ ਨਾ ਉੱਥੇ ਸੱਜਣ ਉੱਥੇ ਚਾਹੀਦਾ ਉਹ ਰਸਤਾ ਦਾ ਨਹੀਂ ਮੈਨੂੰ ਪਤਾ ਨਾ ਉੱਥੇ ਪਹੁੰਚਣ ਦਾ ਸੋਣਿਆਣਾ ਜਰੂਰ ਹੈ ਪਰ ਪਛਾਵੇ ਕੋਣ ਰਾਣੀ ਦਾ ਅਸਰ ਹੋਈ ਨਾਲਕ ਮਨ ਤ੍ਰਿਪਤਾਸ਼ੀ ਹੈ ਸਿਰਤੇ ਸਾਚੇ ਨਾ ਹੈ ਉੱਥੇ ਜਾ ਕੇ ਉਹਨੂੰ ਤ੍ਰਿਪਤ ਹੁੰਦਾ ਹੈ ਉੱਥੇ ਜਾ ਕੇ ਸਬਤ ਕਰਦਾ ਸੱਚੇ ਨਾਮ ਦੀ ਉੱਥੇ ਜਾ ਕੇ ਮਿਲਦਾ ਨਾਮ ਫਿਰ ਸਿਰਤ ਕਰਦਾ ਫਿਰ ਇਹਨੂੰ ਕੋਈ ਧੁਖ ਨਹੀਂ ਰਹਿੰਦੀ ਉੱਥੇ ਮੈਂ ਪਹੁੰਚਣਾ ਚਾਹੁੰਦੀ ਉਸ ਅਵਸਥਾ 'ਚ ਕੋਈ ਦੱਸ ਨਹੀਂ ਰਿਹਾ ਵੀ ਉਹ ਅਵਸਥਾ ਕਿਹੜੇ ਰਾਹ ਜਾ ਕੇ ਪ੍ਰਾਪਤ ਹੋਊ ਠੀਕ ਹੈ ਅਜੇ ਤੱਕ ਮਲ ਖੋਜ ਜਾਰੀ ਹੈ ਇਸ ਸ਼ਲੋਕ ਚ ਅਜੇ ਮਿਲਿਆ ਨੀ ਹੈ ਜੀ ਹਾਂਜੀ ਸਮਝਾਉਣ ਵਾਲਾ ਕੋਈ ਨਹੀਂ ਸਮਝਾਏ ਜੀ ਤੇ ਇਹ ਸ਼ਲੋਕ ਪਹਿਲੇ ਮਹੱਲੇ ਦਾ ਵੈਸੇ ਹਾਂਜੀ ਤੇ ਜਿਹੜਾ ਦੂਸਰਾ ਸ਼ਲੋਕ ਹੈ ਹੁਣ ਤੀਸਰੇ ਮਹੱਲੇ ਦਾ ਹੈ ਮਹੱਲਾ ਤੀਜਾ ਆਪੇ ਕਰਨੀ ਕਾਰ ਆਪੇ ਕਰੇ ਰਜਾਈ आप पे किसी बख्श लाए आप पे कार कमाए ए जीव जड़ा हैगा दो होया होया, कर कार करता आपे करे रजाए आपे रजा करदा जे एथा मारना आपे मारदा जे रजामंदी करनी है जे तर ता भी रजामंदी आपे का मन जे तो आगे लड़दे कि रजामंदी नहीं कर सकदे बुद्धि भी कर सकदे ओना मर्जी है ਉਹਨਾਂ ਨੇ ਲੜਕੇ ਰਹਿਣਾ ਮਿਲਕੇ ਰਹਿਣਾ ਤੇ ਇਹ ਦੋਸਾਂ ਆਇਆ ਹੈ ਤੇ ਕਾ ਆਇਆ ਪਾਸੇ ਤੇ ਨੇ ਉਪਦੇਸ਼ ਦਿੱਤਾ ਦੂਜਾ ਚਲੋ ਠੀਕ ਹੈ ਕਿ ਆਪੇ ਕਰਨੀਕਾਰ ਆਪ ਆਪਣੇ ਆਪ ਇਸ ਕਾਰ ਨਾਲ ਅਲੱਗ ਹੋਇਆ ਆ ਪੈਰ ਪਾੜਾ ਮਾਰਿਆ ਨੇ ਆਪਣੇ ਕਿਸੇ ਨੇ ਨਹੀਂ ਭਲਾਈ ਠੀਕ ਹੈ ਤਾਂ ਰਜ਼ਾਇਦਾ ਮਤਲਬ ਰਜ਼ਾਮੰਦੀ ਇੱਥੇ ਹੈ ਜੀ ਆਪੇ ਕਰੇ ਰਜ਼ਾਇ ਹਾਂ ਰਜ਼ਾਮੰਦੀ ਹੋਈ ਆ ਤੁਹਾਡੀ ਰਜ਼ਾਇ ਕੋਣੀ ਠੀਕ ਆਪੇ ਕਾਰ ਕਮਾਈ ਗਲਤੀਆਂ ਆ ਫਿਰ ਕੰਮ ਸ਼ੁਰੂ ਕਰ ਦਿੰਦੇ ਨੇ ਤਾਂ ਕਾਰ ਕਮਾਈ ਤਾਂ ਕਮਾਈ ਵਾਲੀ ਕਾਰ ਹੁੰਦੀ ਹੈ ਜਿਆ ਮਨ ਭੁੱਲ ਮੰਨ ਲੈਂਦਾ ਉਹ ਬਖਸ਼ ਦਿੰਦਾ ਰਜ਼ਾਮੰਦੀ ਹੋ ਜਾਂਦੀ ਹੈ ਫਿਰ ਕਮਾਈ ਸ਼ੁਰੂ ਹੋ ਜਾਂਦੀ ਅੱਗੇ ਦੀ ਫਿਰ ਸ਼ਬਦ ਵਿਚਾਰ ਸ਼ੁਰੂ ਕਰ ਦਿੰਦੇ ਨੇ ਰਕੇ ਰਹਿਦੇ ਨੇ ਠੀਕ ਹੈ ਗੁਰਬਾਣੀ ਵੀ ਸਮਝ ਆ ਜਾਂਦੀ ਹੈ ਮਨ ਵੀ ਲੈਂਦੇ ਨੇ ਸਭ ਕੁਝ ਹੋ ਜਾਂਦਾ ਨਾਨਕ ਚਾਨਣ ਗੁਰ ਦੁੱਖ ਬਿਖ ਜਾਲੀ ਨਾਏ ਨਾਨਕ ਚਾਨਣ ਗੁਰ ਗਿਆਨ ਨਾਲ ਚਾਨਣ ਹੋੜ ਗੁਰ ਮੇਲ ਦਾ ਚਾਨਣ ਹੋ ਜਾਂਦਾ ਦੁੱਖ ਬਿਖ ਜਾਲ ਹੀ ਨਾਏ ਆ ਮਾਇਆ ਦਾ ਲੋਕ ਦੇਖਣਾ ਦੇਖ ਮਾਇਆ ਇਹ ਤਾਂ ਦੁੱਖ ਜਿਹੜਾ ਹੁੰਦਾ ਹੈ ਮਾਇਆ ਚਲੇ ਗਈ ਦੁੱਖ ਜਾ ਰੋਣ ਲੱਗਦਾ ਹੈ ਇਹ ਨਾਮ ਜਾਲ ਲੰਦਾ ਤੇ ਇਹਦਾ ਦੁੱਖ ਨਹੀਂ ਫਿਰ ਹੁੰਦਾ ਗੁਰਬਾਣੀ ਸੋਚੀ ਇਹ ਦੁੱਖ ਤੋਂ ਖੜਾ ਛੁਡਾ ਦਿੰਦੀ ਜੀ ਇਹਦਾ ਦੁੱਖ ਨਹੀਂ ਫਿਰ ਲੱਗਦਾ ਇਹ ਘੜਤੀ ਵੱਧੀ ਰਹਿੰਦੀ ਵੀ ਹੁੰਦਾ ਨਾਮ ਜਿਹੜਾ ਆਤਮ ਗਿਆਨ ਆ ਜਿਹੜਾ ਮਾਇਆ ਦਾ ਦੁੱਖ ਹੈ ਜਾਲਣ ਲੈ ਠੀਕ ਹੈ ਗੁਰ ਤੋਂ ਹੀ ਫਿਰ ਨਾਏ ਮਿਲਿਆ ਜੀ ਗੁਰ ਤੋਂ ਹੀ ਗਿਆਨ ਮਿਲਿਆ ਹਾਂ ਗੁਰ ਤੋਂ ਗਿਆਨ ਠੀਕ ਹੈ ਜੀ ਪੜੀ ਮਾਇਆ ਵੇਖਣਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਮੂਖਾ ਮੂਰਖਾ ਆ ਮਾਇਆ ਨੂੰ ਦੇਖ ਕੇ ਨਾ ਭੁੱਲ ਵੀ ਮਾਇਆ ਹੀ ਹੈ ਤੇਰਾ ਇਹ ਦੇਖ ਕੇ ਭੁੱਲ ਜਾ ਕੁਝ ਹੋਰ ਹੈ ਸਰੀਰ ਨਹੀਂ ਹੈ ਤੂੰ ਬੋਲਿਆ ਫਿਰਦਾ ਕਿ ਤੂੰ ਸਰੀਰ ਹੀ ਹੈ ਚਲਦਿਆਂ ਨਾਲ ਨਾ ਚੱਲਈ ਇਹ ਸਰੀਰ ਨਹੀਂ ਨਾਲ ਜਾਣਾ ਤੇਰੇ ਚਲਦਿਆਂ ਵੇ ਤੂੰ ਜਾਣਾ ਸਰੀਰ ਤੇਰਾ ਜਨ सब ਝੂਠ ਦਰਬ लखा ਧੰਦੋਲ ਤੇ ਵੀ ਝੂਠ ਹੈ ਜੋ ਤੈਨੂੰ ਨਹੀਂ ਦਰਵਾ ਇਹ ਵੀ ਝੂਠ ਹੈ ਨਾਲ ਨਹੀਂ ਜਿਨ ਹਰ ਰਸ ਚੱਖਾ ਅਗਿਆਨੀ ਆ ਜਨ ਜਿਹੜਾ ਗਿਆਨਤਾਜ ਫਸਿਆ ਹੋਇਆ ਉਹਨਾਂ ਜਰਾਨਾ ਵੀ ਹੈ ਇਹ ਕੁਝ ਨਹੀਂ ਸਕਦਾ ਇਹ ਗੱਲ ਨੂੰ ਲੜਕੀ ਹੈ ਕਾਲੀ ਕਾਲੀ ਪੱਟੀ ਬੱਦੀ ਕਾਲੀ ਤਲਵਾਰ ਹੈ ਤੇਰੀ ਤਲਖਾ ਢਾਣਖ ਦੀ ਇਹ ਖੜ ਗਏ ਮਾਰ ਦੇਣੇ ਇਹਨੂੰ ਇਹਦੀ ਵੜ ਦੇਣੇ ਇਹ ਦੂਜੀ ਆ ਖੜ ਗੰਧਾ ਕਿਤੇ ਆਪਣੀ ਮਰਜੀ ਦੀ ਖੜਕ ਹੈ ਤੇ ਕਲ ਕਾਤੀ ਰਾਜੇ ਕਾ ਸਾਈ ਤੇ ਇੱਥੇ ਵੀ ਖੜਕ ਨੂੰ ਉਹਨਾਂ ਨੇ ਪੁਰਸ਼ਵਾਚਕ ਲਿਖਿਆ ਪੀ ਇਸਤਰੀਵਾਚਕ ਨਹੀਂ ਉਭਰੇ ਜਿਨ ਦੀ ਕਿਰਪਾ ਨਾਲ ਉਹੀ ਉਭਰੇ ਨੇ ਉਹੀ ਬਚੇ ਨੇ ਉੱਪਰ ਨਿਕਲੇ ਨੇ ਧਰਮ ਦੇ ਜਾਲ ਤੋਂ ਟੱਟ ਕੇ ਜਿਹਨੇ ਹਰ ਰਸ ਚੱਖਾ ਜਿਹਨਾਂ ਨੇ ਹਰ ਰਸ ਚਖ ਲਿਆ ਦਾ ਗੜ ਕੇ ਬਾਹਰ ਆਏ ਨੇ ਔਰ ਉਂਗੜ ਕੱਟ ਕੇ ਗਿਆਨ ਖੜ ਦੇ ਨਾਲ ਹਰੇ ਆਪ ਕਿਰਾਏ ਕਰੇ ਆਪ ਆਪੇ ਹਰ ਰੱਖਾ ਹਰ ਆਪੇ ਰਾਖੀ ਕਰਦਾ ਉਸ ਅਵਸਥਾ 'ਚ ਕਰਾਉਂਦਾ ਮਨ ਤੋਂ ਕਰਾਉਂਦਾ ਕਰਦਾ ਉਹੀ ਸਰੀਰ ਕਰਕੇ ਚਾਹੇ ਚਿੱਤ ਕਰਦਾ ਕਰਦਾ ਆਪੇ ਹੀ ਹੋ ਆਪ ਕਿਰਾਏ ਕਰੇ ਆਪੇ ਹਰ ਰੱਖਾ ਰੱਖਾ ਰੱਖਿਆ ਕਰਦਾ ਆਪੇ ਜੀਵ ਜੀਵ ਰੱਖਿਆ ਵੀ ਆਪੇ ਕਰਦਾ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਸਮਾਪਤੀ ਹੈ ਜੀ